ਚਲੋਕ ਮਹਲਾ ਤੀਜਾ ਮਨ ਹਠ ਕਿਨੇ ਨਾ ਪਾਇਓ ਕਰਮ ਕਮਾਏ ਮਨ ਹਠ ਭੇਖ ਦੇ ਦੁਖ ਪਾਇਆ ਦੂਜੇ ਪਾਇ ਤਰਬੋ ਦੇ ਤੇਖਦੀ ਵੱਖ-ਵੱਖ ਭਗਤਾਂ ਨਾਲ ਕੋਈ ਦੇਖਦੀ ਵੱਖ-ਵੱਖ ਜਗ੍ਹਾ ਦੇ ਭਗਤ ਦੇ ਪਹਿਰਾਵੇ ਅੱਡ-ਅੱਡ ਹੁੰਦੇ ਨੇ ਹਰ ਗਾਇ ਗੁਰਮਤਿ ਮਾਰਗ ਹੈ ਜਿਹੜਾ ਇਹਦੇ ਚ ਦੇਖਦੀ ਹੁੰਦਾ ਅਜਿਹਾ ਖਾਸ ਹੈ ਸਾਜਿਆ ਇਹ ਭੇਸ ਨਹੀਂ ਇਹ ਤਾਂ ਪਹਿਲਾ ਚੱਲਦਾ ਮਾਰਗ ਤਾਂ ਪਹਿਲਾ ਚੱਲਦਾ ਇਹ ਤਾਂ ਖਾਸ ਹੈ ਤਾਂ ਫੌਜ ਆ ਵਰਦੀ ਹੈ ਠੀਕ ਹੈ ਉਹ ਜਿਆ ਸਾਜਿਆ ਉਹਦੀ ਵਰਦੀ ਅਲੱਗ ਹੁੰਦੀ ਆ ਆਪਾਂ ਸਿਵਲ ਦੇ ਵਿੱਚ ਵੀ ਆਪਣੇ ਦੇ ਪਿੱਤੇ ਚੁੱਕ ਭੁੱਲ ਕੇ ਆਪਣੇ ਦੇ ਗੋਲੀ ਜਾਂ ਤੀਰ ਜਾਂ ਕੁਝ ਦੂਰੋਂ ਵਰਦੀ ਆਡਾ ਦੁਖਦੀ ਹੁੰਦੀ ਹੈ ਟੀਪੋ ਦੀ ਵੀ ਹੁੰਦੀ ਹੈ ਖੇਡਣ ਵਾਲਿਆਂ ਦੀ ਫੌਜਾਂ ਦੀ ਵੀ ਹੁੰਦੀ ਹੈ ਵਾਨਾਟ ਵਾਸਤੇ ਕੋਈ ਜਗ੍ਹਾ ਨਹੀਂ ਚਾਹੀਦੀ ਵਿਚਾਰ ਵਾਸਤੇ ਜਗ੍ਹਾ ਵਾਨਾਟ ਇਹ ਹੁੰਦਾ ਵੀ ਮੈਂ ਮੰਨ ਲਈ ਨਹੀਂ ਹੈ ਜੋ ਮੈਂ ਕਰ ਰਿਹਾ ਚਾਹੇ ਗਲਤ ਵੀ ਸਾਬਤ ਹੋ ਜੇ ਮੈਂ ਨਹੀਂ ਛੱਡੂ ਜੇਰਾ ਰਾਹ ਸੀ ਅਪਣਾ ਲਿਆ ਚਾਹੇ ਗਲਤ ਸਾਬਤ ਹੋਵੇ ਲੋਕ ਸਾਖੀ ਉਹ ਕਹਿੰਦੇ ਜੀ ਅਜਿੱਤ ਜਿਵੇਂ ਆਪਾਂ ਜਿੱਤ ਗਏ ਜਿੱਨਾ ਨਾ ਪਾਇਓ ਜਿੰਨੇ ਮਾਰਡ ਹਾਸ ਰਾਲੇ ਨੇ ਇਹਨਾਂ ਦੇ ਭੇਸ ਦੇ ਸਾਰਿਆਂ ਦੀ ਪਹਿਲੀ ਗਲਤਾਂ ਇਹਨਾਂ ਨੇ ਕੋਈ ਵੀ ਕੁਝ ਪ੍ਰਾਪਤ ਨਹੀਂ ਹੋਈ ਇਹਨਾਂ ਨੂੰ ਪ੍ਰਾਪਤੀ ਨਹੀਂ ਹੁੰਦੀ ਜੀ ਇਹ ਜਿਹੜੇ ਰਿੱਧ ਸਿੱਧ ਦੀ ਗੱਲ ਕਰਦੇ ਨੇ ਰਿੱਧ ਸਿੱਧ ਦੀ ਗੱਲ ਇਹ ਸਿੱਧੀ ਸੰਤ ਕਰਦੇ ਨੇ ਇਹਨਾਂ ਪ੍ਰਾਪਤੀ ਨਹੀਂ ਹੋ ਸਕਦੀ ਆਤਮਾ ਦੀ ਸ਼ਾਂਤੀ ਦੀ ਸ਼ਾਂਤੀ ਨਹੀਂ ਹੋ ਸਕਦੀ ਮੁਕਤੀ ਨਹੀਂ ਮਿਲ ਸਕਦੀ ਜਿਹੜੀ ਕਿ ਮੁਕਤੀ ਧਰਮ ਦਾ ਪਹਿਲਾ ਟੀਚਾ ਮੁਕਤੀ ਹੈ ਉਹਨਾਂ ਹੱਥ ਤੇਖ ਕਰ ਭਰਮ ਦੇ ਧੇਖ ਕਰਕੇ ਭਰਮੇ ਫਿਰਦੇ ਨੇ ਅਸੀਂ ਧਾਰਮਿਕ ਹੋ ਕੇ ਜਿਹੜਾ ਭੇਖ ਹੁੰਦਾ ਨਾ ਜਿਵੇਂ ਅਸੀਂ ਵੀ ਕਹਿੰਦੇ ਆ ਕਿ ਰੱਖ ਲੈ ਉਹ ਕਰ ਲੋ ਕਿਰਪਾਨ ਪਾ ਲੋ ਵੈਸੇ ਜਿਹੜਾ ਇਹ ਨਹੀਂ ਹੈ ਭਰਮ ਇਹ ਮਨਅਠ ਵਾਲੇ ਕਰਦੇ ਨੇ ਸਾਗਾ ਤਾਂ ਹੈ ਹੀ ਨਹੀਂ ਇਹ ਮਨਅਠ ਭੇਖ ਕਰ ਭਰਮ ਦੇ ਦੁੱਖ ਪਾਇਆ ਦੂਜੇ ਪਾਇ ਦੂਜੇ ਪਾਇ ਦੁੱਖ ਹੈ ਜਿਵੇਂ ਅੱਜ ਕਰੇਗਾ ਖਾਲਸਾ ਚੱਤੋਂ ਸ਼ੁਰੂ ਹੋਇਆ ਜਾਂ ਤੋ ਦੁੱਖੇ ਦੁੱਖ ਦੇ ਕਲੇਸ਼ ਨੇ ਪ੍ਰਾਪਤੀ ਕੋਈ ਨਹੀਂ ਗੁਰਮਤਿ ਵਿੱਚ ਕੋਈ ਨੇ ਵੀ ਕੀਤੀ ਆ ਨੇ ਕਬਜ਼ਾ ਨਹੀਂ ਕੀਤਾ ਲਾਹੌਰ ਵਾਲਿਆਂ ਪਹੁੰਚਾ ਨੇ ਚਾਰ ਵਾਰ ਨਾ ਪਾਇਓ ਸਭ ਥੱਕੇ ਕਰਮ ਕਮਾਏ ਮਨ ਹਠ ਭੇਖ ਕਰ ਭਰਮ ਦੇ ਦੁੱਖ ਪਾਇਆ ਦੂਜੇ ਭਾਏ ਉਹਨਾਂ ਹੱਥੇ ਵਿੱਚ ਕੁਛ ਨਹੀਂ ਭਰਮ ਹੁੰਦਾ ਉਹਨਾਂ ਨੂੰ ਵੀ ਅਸੀਂ ਧਾਰਮਿਕ ਦਾ ਧਾਰਮਿਕ ਦੀ ਹੁੰਦੇ ਉਹਨਾਂ ਨੂੰ ਵੀ ਕੁਛ ਮਨ ਨਿਰਮਲ ਹੋਵੇ। ਅਗਿਆਨ ਅੰਧੇਰਾ ਜਾਏ। ਕੋਈ ਆ ਕੀ ਹੁੰਦੀ ਲੋਕਾਂ ਨੂੰ ਕਹਿੰਦੇ ਸਾਡੇ ਕੋਲ ਰਿੱద్ధి ਸੰਤ ਕਹਿੰਦੇ ਨੇ। ਗੁਰਮਤਿ ਨਹੀਂ ਹੈ ਰਿੱਧ ਸਿੱਧਾ ਸਭ ਮੋਹ ਹੈ ਇਹਦਾ ਸਾਰਾ ਮਾਇਆ ਦਾ ਮੋਹ ਹੈ ਅਰਥ ਨਾਮ ਨ ਬੱਥੇ ਨਾਏ ਕਿਸੇ ਦੇ ਅੰਦਰ ਲੋਭ ਨਹੀਂ ਬੱਥਿਆ ਕਦੇ ਕਿਸੇ ਮਨੁਹਾੜਾ ਦੇ ਕੋਈ ਐਸਾ ਗ੍ਰੰਥ ਨਹੀਂ ਜਿਹਦੇ ਤੋਂ ਤੁਹਾਨੂੰ ਸ਼ਾਂਤੀ ਮਿਲੇ ਗੁਰਬਾਣੀ ਵਿੱਚ ਜਿੱਦਿਆਂ ਦੀ ਵੀ ਬਾਣੀ ਦਰਜ ਹੈ ਕੋਈ ਸਾਰੇ ਮਨ ਹੜਤੇ ਉਸ ਇਖਤਸਰਾਫ ਨਹੀਂ ਗੁਰਸੇਵਾ ਤੇ ਮਨ ਬਸ ਮਿਹਰਬਾਨ ਉਹ ਬੰਨ ਮਿਹਰਬਾਨ ਹੁਦਾ ਅਗਿਆਨਤਾ ਦੇ ਰਾਜ ਦੇਖੋ ਮਨ ਨਿਰਮਲ ਦੀ ਡਿਫੀਨੇਸ਼ਨ ਤੇ ਇੱਥੇ ਠੀਕ ਹੈ ਜੀ ਮਨ ਨਿਰਮਲ ਦਾ ਮਤਲਬ ਇਹ ਨਹੀਂ ਹੈ ਕਿ ਮੇਰੇ ਅੰਦਰ ਕਪਟ ਨਹੀਂ ਹੈ ਮੈਂ ਇਮਾਨਦਾਰ ਹਾਂ ਇਹ ਦੀ ਹੈ ਮਨ ਨਿਰਮਲ ਸੀ ਕਬੀਰ ਦਾ ਉਦੋਂ ਵੀ ਪਹਿਲਾਂ ਕਾਸ਼ੀ ਦਾ period ਹੈ ਨਿਰਮਲ ਲੇਕਿਨ ਅਗਿਆਨਤਾ ਸੀ ਕਪਟ ਹੋਰ ਤੋਂ ਠੱਗੀ ਥੋਰੀ ਤੋਂ ਕਈ ਨਗਲਾਂ ਤੋਂ ਬੁਰਾਈ ਦਾ ਤੋਤਾ ਨਿਰਮਲ ਹੋਣਾ ਗਿਆਨਤਾ ਦੀਆਂ ਗਿਆਨਤਾ ਤੱਕ ਕੋਈ ਆਤਮਦਰਸ਼ੀ ਨਹੀਂ ਹੈ ਗਿਆਨ ਦੀ ਉਹ ਭਲੇ ਆਦਮੀ ਹੋ ਚੰਗੇ ਵੀ ਹੋ ਜੀਏ ਲੇਕਿਨ ਆ ਗਿਆਨਤਾ ਇੱਕ ਤਾਂ ਵੱਖਰੀ ਚੀਜ਼ ਹੈ ਵਰਮਾ ਦੀ ਜੋਜੀ ਵੱਖਰੀ ਗੱਲ ਹੈ ਹਾਂ ਉਹ ਆਦਮੀ ਬਹੁਤ ਖੇਤੀ ਸਮਝ ਜਾਂਦਾ ਇਹ ਇਹ ਗੱਲ ਜ਼ਰੂਰ ਹੈ ਜਦੋਂ ਕੋਈ ਵਾਹਤਾਰ ਹੁੰਦਾ ਬਹੁਤ ਛੇਤੀ ਉਹ ਪਕੜ ਕੇ ਚਲਾ ਜਾ ਸਕਦਾ ਉਹਦਾ ਪਹਿਲਾ ਬੋਲ ਸਾਫ਼ ਹੁੰਦਾ ਗਿਆਨ ਦੀ ਜਿਹੜਾ ਬੋਨਾ ਜੋ ਗਿਆਨ ਨਹੀਂ ਹੈ ਉਹ ਦਾਰੀ ਬੱਕਰੀ ਗੱਲ ਹੈ ਠੀਕ ਹੈ ਜੀ ਨਾਮ ਰਤਨ ਘਰੀ ਪ੍ਰਗਟ ਹੋਆ ਸਹਿਜ ਸਮਾਈ ਹਾਂ ਜਦੋਂ ਅਗਿਆਨਤਾ ਦਾ ਮੇਰਾ ਜਾਂਦਾ ਹੈ ਉਹਦੇ ਬਾਅਦ ਨਾਮ ਰਤਨ ਜਿਹਦੇ ਵਿੱਚ ਪ੍ਰਗਟ ਹੁੰਦਾ ਨਾਮ ਰਤਨ ਕੀ ਹੈ ਜਿਹੜਾ ਉਹ ਤੁਰਕੀ ਬਾਣੀ ਆਈ ਸਗਲੀ ਜਿਤ ਬਣਾਈ ਜਿਤ ਸਗਲੀ ਨਾ ਪੈਂਦਾ ਉਹ ਪ੍ਰਗਟ ਹੋਇਆ ਇੱਥੇ ਜਿਹੜਾ ਪਹਿਲਾਂ ਅਸੀਂ ਗੁਰਬਤ ਤੋਂ ਸਮਝਦੇ ਆ ਇਹ ਤਾਂ ਇਹ ਤਾਂ ਅਸੀਂ ਸਮਝ ਰਹੇ ਹਾਂ ਲੋ ਸਮਝ ਕੇ ਫੇਰ ਉਹ ਵਿੱਚੋਂ ਪ੍ਰਗਟ ਹੁੰਦਾ ਉਹਨੂੰ ਕਬੀਰ ਕਹਿੰਦਾ ਗੋਲਾ ਗਿਆਨ ਚਲਾਇਆ ਅੰਦਰੋਂ ਪ੍ਰਗਟ ਹੁੰਦਾ ਫਿਰ ਗਿਆਨ ਇਹ ਸਾਰੀ ਬਾਣੀ ਅੰਦਰੋਂ ਪ੍ਰਗਟ ਹੋਈ ਹੋਈ ਆ ਅਰੇ ਹੋਆ ਨਾਨਕ ਸਹਿਜ ਸੁਭਾਈ ਨਾਨਕ ਦਾ ਮਨ ਜਿਹੜਾ ਹੈ ਸਹਜ ਅਵਸਥਾ ਤੋਂ ਚਲਾ ਜਾਂਦਾ ਹੈ ਪੂਰੀ ਤਰ੍ਹਾਂ ਟਿਕ ਜਾਂਦਾ ਹਮੇਸ਼ਾ ਲਈ ਟਿਕ ਜਾਂਦਾ ਹੈ ਹਮੇਸ਼ਾ ਲਈ ਇਹਦਾ ਮਨ ਟਿਕ ਜਾਂਦਾ ਉਸ ਕਹਿੰਦੇ ਸੀ ਮਤਲਬ ਇਹ ਹੋਰ ਕੁਝ ਦਾ ਸਮਝ ਲਿਓ ਕੋਈ ਅਰਥ ਕਹਿੰਦਾ ਠੀਕ ਹਾਂ ਆਪਣਾ ਟਿਕਿਆ ਹੋਇਆ ਕੀ ਟਿਕਿਆ ਹੋਇਆ ਜਿਹਦਾ ਮਨ ਹੈ ਉਹਨੂੰ ਪਤਾ ਲੱਗ ਜਾਂਦਾ ਜਿੰਨਾ ਜਰ ਮਨ ਤੋਂ ਅਟਕਦਾ ਨਹੀਂ ਤੇ ਜੀ ਐ ਸਮਝ ਲਓ ਸਬੂਰ ਦੀ ਵਾਸਤਾ ਜੀ ਕੋਈ ਕਮੀ ਹੈ ਇਹਨੂੰ ਸਮਝਾਓ ਬੰਦੂ ਚੌੜੋਂ ਦਾਹ ਹਾਂਜੀ ਤੀਜਾ ਸ਼ਬਦ ਸਵਾਦਨਾ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਹੋਏ ਖੁਆਰ ਜਿਹੜੋ ਗੁਰਬਾਣੀ ਵਿੱਚੋਂ ਟੇਸ ਨਹੀਂ ਆਹਦਾ ਸਾਖੀਆਂ ਦਾ ਸਾਖੀ ਸੁਣਾਓ ਗੁਰਬਾਣੀ ਛੱਡੋ ਕਿਉਂ ਨਾ ਸਮਝ ਨਹੀਂ ਆਈ ਇਹ ਵੀ ਜਿਹਦੀ ਸੁਪਿਆ ਲੋ ਗੁਰਬਾਨੀ ਦੀ ਉਹ ਹੀ ਇਹਦਾ ਟੇਸਟ ਹੈ ਠੀਕ ਹੈ ਸਹੀ ਸਮਝ ਹਾਂ ਸਹੀ ਸਮਝ ਜੋ ਗੱਲ ਕਹੀ ਹੈ ਪੱਲੇ ਪੱਲੇ ਭੁੱਖ ਹੈ ਪੱਲੇ ਪੌਂਡ ਦੀ ਲੋੜ ਹੈ ਮਿੱਠਾ ਉਹਨੂੰ ਲੱਗੂਗਾ ਜਿਹਨੂੰ ਆਪ ਦਾ ਰਸ ਆ ਗਿਆ ਟੇਸਟ ਆ ਗਿਆ ਉਹਨੂੰ ਤਾਂ ਮਿੱਠਾ ਲੱਗੂਗਾ ਜੇ ਨਹੀਂ ਆਇਆ ਸਾਦ ਆਇਓ ਨਾਮ ਨਾਲ ਲੱਗੋ ਪਿਆਰ ਉਹਦਾ ਨਾਮ ਨਾਲ ਪਿਆਰ ਨਹੀਂ ਲੱਗ ਸਕਦਾ ਉਹਨੂੰ ਕੋੜਾ ਲੱਗੂਗਾ ਸੱਚ ਸੱਚ ਕੌੜਾ ਫਿਰ ਮੈਨੂੰ ਲੱਗਦਾ ਨਾਮ ਕੌੜਾ ਜਿਹਨੂੰ ਲੱਗਦਾ ਜੇ ਤੂੰ ਸਾਧਨੀ ਆਇਆ ਤੂੰ ਸਾਧ ਉਹਨੂੰ ਟੇ ਉਹਨੂੰ ਲੋੜੇ ਨਹੀਂ ਸੀ ਰਸਨਾ ਫਿੱਕਾ ਜਿਹੜੇ ਬੋਲਦੇ ਨੇ ਲੋ ਜੋ ਵੀ ਉਪਦੇਸ਼ ਕਰਦੇ ਨੇ ਉਹ ਫਿੱਕਾ ਹੈ ਉਹ ਮਾਇਆ ਦੀਆਂ ਗੱਲਾਂ ਹੀ ਨੇ ਸਾਦੀ ਹੈ ਨਿਤਨੇਤ ਚ ਕੁਰਮਤੋ ਜਿਹੜੇ ਥੱਲੇ ਦੇ ਉਪਦੇਸ਼ ਨੇ ਜਿੱਨੇ ਸਿਬ੍ਰਤ ਸਾਸਤ੍ਰਾਲ ਦੇ ਉਹਨੂੰ ਤਾਨੇ ਕੇ ਨੋ ਬਿਨੋ ਸਭ ਕੂੜ ਗਾਲੀਓ ਨਾ ਬਦੀ ਨਾ ਹੈ ਜਿੱਥੇ ਠੀਕ ਹੈ ਜੀ ਉਹਨੂੰ ਠਿੱਕਾ ਕਹਿੰਦੇ ਨੇ ਠਿੱਕਾ ਬੋਲਣ ਹਾਂ ਕਿਰਤੀ ਪਏ ਕਮਾਵਣਾ ਕੋਈ ਨਾ ਮੇਟਣ ਹਾਰ ਸ਼ਬਦ ਵਿਚਾਰ ਕਰਦਾ ਕਿਰਤ ਮੰਦੇ ਲੈਵਲ ਦੀ ਹੁੰਦੀ ਹੈ ਜਦੋਂ ਮਾਨ ਹੁੰਦੀ ਵਿਚਾਰ ਕਰਦੇ ਫਿਰਦਾ ਕਿਰਤ ਜਿਹੜੇ ਪਏ ਹੋਏ ਨੇ ਉਹਨਾਂ ਨੇ ਕਮਾਉਣਾ ਜਿਹੜੇ ਸ਼ਬਦ ਵਿਚਾਰ ਕਰਦੇ ਨੇ ਉਹਨਾਂ ਨੂੰ ਕੁਝ ਮਿਲ ਲੈਣਾ ਅੱਛਾ ਜੀ ਜਿਹੜੇ ਵਿਚਾਰ ਵਾਲੇ ਪਾਸੇ ਲੱਗੇ ਹੀ ਨਹੀਂ ਹੋਏ ਫਿਰ ਉਹ ਪੜਪੜ ਗੱਡੀ ਲੱਦੀ ਹੈ ਠੀਕ ਹੈ ਕੋਈ ਨਾ ਉਹਨਾਂ ਦੇ ਅੰਦਰ ਜੋ ਸਮਝ ਆ ਜਾਂਦੀ ਹੈ ਉਹ ਹੀ ਦੁਨੀਆ ਦੀ ਤਾਕਤ ਹੈ ਦੁਨੀਆ ਹੈਗੀ ਕੋਈ ਦੁਨੀਆ ਦਾ ਗਿਆਨ ਨਹੀਂ ਹੈ ਵਾਲੇ ਦਾ ਗਿਆਨ ਧੋ ਦਿੰਦਾ ਹੁੰਦਾ ਕੋਰ ਮਤਨੈ ਦਾ ਦੂਜਾ ਗਿਆਨ ਗਿਆਨ ਦਾ ਧੋ ਕੇ ਉਹਨਾਂ ਦਾ ਗਿਆਨ ਪੜ ਕੇ ਭਰਮ ਹੁੰਦਾ ਹੀ ਨਹੀਂ ਹੈ ਤੁਹਾਨੂੰ ਦਾ ਨਾਸ ਕਰਨ ਵਾਲਾ ਗਿਆਨ ਇਹਨੂੰ ਕੌਣ ਬਟਾ ਦੂਗਾ ਹਾਂਜੀ ਠੀਕ ਹੈ ਜੀ ਪੌੜੀ ਤਨ ਤਨ ਸਤਪੁਰਖ ਸਤ ਗੁਰੂ ਹਮਾਰਾ ਜਿਤ ਮਿਲਿਆ ਹਮਕੋ ਸ਼ਾਂਤ ਆਈ ਤਨ ਤਨ ਮਿਲੀ ਸਤ ਗੁਰੂ ਹਮਾਰਾ ਜਿਤ ਮਿਲਿਆ ਹਮ ਹਰ ਪਾਈ ਦੇ ਕੋਈ ਤੇ ਸਤ ਗੁਰੂ ਸਤਪੁਰਖ ਦੀ ਅੱਡ ਅੱਡ ਸਮਝਾਉਗੀ ਵੀ ਸਥਾਨ ਕੀ ਹੈ ਤਨ ਤਨ ਸਤਪੁਰਖ ਹਾਂ ਇਦਾਂ ਉਹ ਸਤਪੁਰਖ ਹੀ ਸਤਗੁਰੂ ਹੈ ਸਤਪੁਰਖ ਜਿਹਨਾਂ ਜਾਣਿਆ ਸਤਗੁਰ ਤਿਸਕਾ ਨਾਮ ਜਿਹਦੇ ਸਤਪੁਰਖ ਜਾਣ ਲਿਆ ਉਹ ਤਾਂ ਸਤਗੁਰ ਹੈ ਸਾਰੇ ਸਤਗੁਰ ਨਾਲਕ ਵੀ ਸਤਗੁਰ ਕਹਿੰਦੇ ਨੇ ਸਤਪੁਰਖ ਜਿਹਨ ਜਾਣਿਆ ਸਤਗੁਰ ਕਹ ਕੀ ਹੈ ਸਤਗੁਰੂ ਹੈ ਜਿਹੜਾ ਹੁਕਮ ਉਹ ਜਿਹਨੇ ਬੁੱਝ ਲਿਆ ਜਿਹਨੇ ਹੁਕਮ ਪੁੱਝ ਲਿਆ ਉਹ ਕੋਮੈ ਸਤਗੁਰੂ ਹੈ ਸਤਪੁਰਖ ਸਤਗੁਰੂ ਹੈ ਨਾ ਸਤ ਜੋ ਤਾਂ ਪੁਰਖ ਸ਼ਬਦ ਹੈ ਉਹ ਜੋ ਪੈਦਾ ਹੋਇਆ ਹੈ। ਇਹ ਸ਼ਬਦ ਗੁਰੂ ਨੇ ਕਿਹਾ ਉਹਦੇ ਵਿੱਚ। ਜੋ ਧੁਰ ਕੀ ਬਾਣੀ ਹੈ ਬਾਣੀ ਵਰਕਾ ਪੂਰਾ ਅਧੂਰੇ ਨੂੰ ਪੂਰਾ ਕਰਨਾ। ਜਿੰਨਾ ਚਿਰ ਅਸੀਂ ਬੋਲਦੇ ਨਹੀਂ ਦੂਜੇ ਨੂੰ ਗਿਆਨ ਨਹੀਂ ਦੇ ਸਕਦੇ ਗਿਆਨ ਸਾਡੇ ਕੋਲ ਨਾ ਹੋਵੇ। ਸਤਿਗੁਰੂ ਸਤਿਗੁਰੂ ਉਹ ਹੈ ਉਹਨਾਂ ਨੂੰ ਸਤਿਗੁਰੂ ਹਮੇਸ਼ਾ ਰਹਿੰਦਾ ਜਿਹੜਾ ਸਤਿਗੁਰੂ ہمارا अच्छा जित बिरिया हमको शांति आई जिन्ना जर शब्द गुरु नाल सूरत दी थी ਨੇ प्या बोलता बडी रहदी है काय मुक्ति होवे वो कह रहे है ओथे भी एक भूख के ਹੁਕਮ ਬੁਝ ਲੈਣਾ ਸੁਰਤ ਸ਼ਬਦ ਦੇ ਵਿੱਚ ਸਮਾ ਜਾਣਾ ਹੋਰ ਗੱਲ ਹੈ ਜਿਨਾ ਜਿਹੜੇ ਕਹਿੰਦੇ ਸੁਰਤ ਸ਼ਬਦ ਨਾਲੋਂ ਸਾਡੇ ਅੰਦਰ ਕੋਈ ਬੰਦੀ ਪ੍ਰਗਟ ਨਹੀਂ ਹੋਈ ਸੁਰਤ ਸ਼ਬਦ ਦੇ ਵਿੱਚ ਬਿਲੀ ਨਹੀਂ ਉਹਦਾ ਜਿਹੜਾ ਸ਼ਾਂਤੀ ਰਹੀ ਹੈ ਉਹ ਸਤਿਗੁਰੂ ਜਿਹੜਾ ہمارا ਜਿਹੜਾ ਨਾ ਹੋਇਆ ਜਾਂ ਸੁਰਤ ਸ਼ਬਦ ਦੇ ਵਿੱਚ ਸਮਾਇਆ ਜਾਂ ਤਾ ਚੱਟੇ ਮਿਲ ਕੇ ਸ਼ਾਂਤੀ ਆਈ ਠੀਕ ਹੈ ਇਹ ਫਿਰ ਚੌਥੇ ਪਦਾਰਥ ਗੱਲ ਚੱਲ ਹੈ हां ए ए ये सिर्फ दर्शक दी गल है ठीक है हां सत सत पुरख सतगुरु हमारा देखो फिर ओही गल कहवे जी जित भी लिया हमको ताकत ही ਉਹ ਤਾਂ ਬਲਾਇਆ ਬੋਲਦਾ ਫਿਰ ਜੜੀ ਸਤਗੁਰੂ ਬੁਲਾਉਂਦਾ ਕੌਣ ਬੋਲਦਾ ਪਹਿਲਾਂ ਜਿਵੇਂ ਆਪਾਂ ਪੜਦੇ ਆ ਸਤਪੁਰਖ ਜਿੰਨ ਜਾਣੇ ਆ ਸਤਗੁਰ ਤਿਸਕਾ ਨਾਮ ਤੇ ਹਾਂ ਉਹ ਸਤਗੁਰ ਸਤਗੁਰ ਨੂੰ ਫਿਰ ਗਾਂਹ ਸਤਗੁਰੂ ਮਿਲਿਆ ਹੈ ਜੀ ਹਾਂ ਉਹ ਸਤਗੁਰੂ ਮਿਲਿਆ ਉਹਦੇ ਚ ਸੁਣਾ ਗਿਆ ਚ ਦਿਆਰ ਨੂੰ ਸਬੂਤਰ ਮਿਲ ਗਿਆ ਸੁਨੂਦਰ ਕੇ ਸਮਾ ਗਿਆ ਉਹ ਧੰ ਤਨ ਹਰ ਭਗਤ ਸਤ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ ਧੰ ਤਨ ਹਰ ਗਿਆਨੀ ਸਤ ਹਮਾਰਾ ਜਿਨ ਵੈਰੀ ਮਿੱਤਰ ਹਮ ਕੋ ਸਭ ਸਮ ਦਿਖਾਈ ਇਹ ਕੀ ਹੈ ਇਹ ਜਦ ਬਿਲ ਜਾਂਦਾ ਨਾ ਇੱਕ ਹੋ ਜਾਂਦਾ ਸਬੂਤਰ ਦੇ ਵਿੱਚ ਦਰਿਆ ਜਾ ਕੇ ਹਾਂਜੀ ਭਗਤ ਹੈ ਨਾ ਜਿਹੜਾ ਇਹ ਨੂੰ ਉਕੜ ਇੱਕ ਹਾਂਜੀ ਤਾਂ ਇਹ ਕ ਆਪਣਾ ਬੂਰੇ ਕਿਉਂ ਕਰਦੇ ਉਹ ਇਹ ਕ ਉਹ ਹੈ ਕਿ ਜਦੋਂ ਸ਼ਬਦ ਨੂੰ ਪ੍ਰਗਟ ਹੋ ਜਾਂਦਾ ਅੰਦਰੋਂ ਤੇ ਕੋਈ ਤਾਂ ਉਪਜ ਹੈ ਜਿਹੜਾ ਉਪਜਿਆ ਹੋਇਆ ਹੈ ਪੈਦਾ ਹੋਇਆ ਹੋਇਆ ਹੈ ਸਾਨੂੰ ਲੱਗਦਾ ਸਰੀਰ ਰੂਪ ਦੇ ਰੂਪ ਤੇ ਰੂਪ ਦੀ ਹੁੰਦਾ ਸਮੁੰਦਰ ਜਿਹਾ دریا ਸਮਾਜਦਾ ਜਾ ਕੇ ਉਸ ਸਮੁੰਦਰੇ ਕਹੋਦੇ ਫਿਰ ਸਮੁੰਦਰ ਰੂਪ ਤਾਂ ਉਹ ਕਹਿ ਸਕਦੇ ਆ ਆਪਣੀ ਵੱਖਰੀ ਪਛਾਣ ਭਗਤਾਂ ਦੀ ਆਪਣੀ ਵੱਖਰੀ ਪਛਾਣ ਦੀ ਕੋਈ ਹੁੰਦੀ ਉਹ ਸਮਾਗ ਦੇ ਸਬੂਤਰ ਜਿਹੜਾ ਸਮਾਗਿਆ ਸੂਤਰ ਰੂਪ ਹੋ ਗਿਆ। ਭਗਤ ਸਬੂਤਰ ਰੂਪ ਕਹਿ ਸਕਦੇ ਹਾਂ ਅਸੀਂ। ਫਿਰ ਉਹਨਾਂ ਦਾ ਆਪਣਾ ਵਖਰਾ ਕੁਛ ਨਹੀਂ ਹੁੰਦਾ ਰਹਿੰਦਾ। ਮੇਰਾ ਮੁਝ ਬਿਲਕੁਲ ਕੁਛ ਜੋ ਕੁਛ ਐਸੋ ਤੇਰਾ ਤੇਰਾ ਤੁਝ ਕੋ ਸੇਵਾ ਤੇ ਹਮ ਹਮ ਹਰ ਨਾਮ ਜਿੰਨੇ ਵੀ ਸੱਚਖੰਡ 'ਚ ਬੈਠੇ ਨੇ ਸਾਰੇ ਭਗਤ ਨੇ। ਮੈਲੀ ਗੱਲ ਇਹ ਹੈ। ਇਹ ਗੱਲ ਉਹਨਾਂ ਦੀ ਹੈ ਸਾਰਿਆਂ ਦੀ। ਉਹ ਸਾਰੇ ਭਗਤਾਂ ਦੇ ਅੰਦਰੋਂ ਹੁਕਮ ਪਹਿਲਾ ਹੁੰਦਾ ਜਿੱਥੋਂ ਸਾਜ ਹਰੜ ਚੋਂ ਉਹ ਸਾਰੇ ਸਤਿਗੁਰੂ ਨੇ ਕੱਲਾ ਕੱਲਾ ਸਾਰੇ ਸਤਿਗੁਰੂ ਕਿਹਾ ਜਾ ਸਕਦਾ ਉਹਨਾਂ ਨੂੰ ਪਰ ਜਿੱਨਾ ਜਿਹਦੇ ਵਿੱਚ ਉਹਨਾਂ ਚੰਦੀ ਕਿਹਾ ਜਾ ਸਕਦਾ ਸਤਗੁਰੇ ਰਹੂਗਾ ਐਨਾ ਫਰਕ ਠੀਕ ਹੈ ਸਰ ਹੈ ਸਰੀਰ ਤੇ ਸਤਗੁਰ ਹੋਊਗਾ ਜਦ ਦੇ ਨਹੀਂ ਰਹੀ ਫਿਰ ਸਤਗੁਰੂ ਰਹਿ ਗਿਆ ਫਿਰ ਨਾਨਕ ਨਹੀਂ ਰਹਾ ਫਿਰ ਨਾਨਕ ਲੈਣਾ ਹੋ ਗਿਆ ਨਾਨਕ ਗਾਂ ਸਮੁੰਦਰ ਹੋ ਗਿਆ ਤੇ دریا ਨਹੀਂ ਰਹਾ ਦੋ ਨਾ ਸਮੁੰਦਰ ਹੋ ਗਿਆ ਲੈਣਾ دریا ਹੋ ਗਿਆ ਉਦੀ ਜਗਾ ਨਾ ਨਾਮ ਹੋ ਗਿਆ ਠੀਕ ਹੈ ਇਹ ਪੇੜ ਹੈ ਇਹ ਪੇੜ ਨਾ ਜਾਣ ਅਣਜਾਣ ਪੜੇ ਤਨ ਤਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨੀ ਵੈਰੀ ਮਿੱਤਰ हमको ਸਭ ਸਮ ਦ੍ਰਿਸ਼ਟ ਦਿਖਾਈ ਹਰ ਕਹਦੀ ਜਿਹਨਾਂ ਹਰ ਗਿਆਨ ਹੈ ਤੋਂ ਗਿਆਨ ਹਰ ਗਿਆਨ ਉੱਥੇ ਨਹੀਂ ਹੁੰਦਾ ਸਤਿਗੁਰੂ ਹੁਸਾ ਤੁਮ ਕਿਉ ਹੈ ਸਤਿਗੁਰੂ ਹਮਾਰਾ ਹਰ ਗਿਆਨੀ ਵੀ ਜਿਹੜਾ ਹਰੀ ਦਾ ਗਿਆਨ ਰੱਖਣ ਵਾਲਾ ਉਹ ਆਦਮੀ ਨਹੀਂ ਹੈ ਉਹਨੂੰ ਤਾਂ ਕਿਤੋਂ ਮਿਲਿਆ ਹੈ ਗਿਆਨ ਇਹਨਾ ਵੈਰੀ ਬਿੱਤ ਰਬ ਕੋ ਸਭ ਆਪਣੇ ਆਪ ਨੂੰ ਤੁਸ ਕੋ ਕਾਹ ਰਹੇ ਨੇ ਸਤਿਗੁਰੂ ਕਿਸੇ ਹੋਰ ਨੂੰ ਕਾਹ ਰਹੇ ਨੇ ਹਰ ਗਿਆਨੀ ਕਿਸੇ ਹੋਰ ਨੂੰ ਕਾਹ ਰਹੇ ਨੇ ਉਹ ਜਿਹੜੇ ਆਪ ਤੋਂ ਪਹਿਲਾਂ ਸਰੀਰ ਦੇ ਵਿੱਚ ਰਹੀ ਰਹੇ ਜੋ ਉਹ ਸਰੀਰ ਨਹੀਂ ਉਹ ਸਮੁੰਦਰ ਰੂਪ ਨੇ ਉਹ ਹਰ ਗਿਆਨੀ ਹੁਡ ਵੀ ਨਾ ਕਬੇ ਫਖਤ ਮਰਦੇ ਤਾਂ ਹੁੰਦੇ ਨਹੀਂ ਕੌਣ ਕਹਿਆ ਸਤਗੁਰੂ ਹੋਇਓ ਇਸ ਕਰਕੇ ਉਹ ਉਹਨਾਂ ਦੀ ਹੂਡ ਬਰਕਰਾਰ ਹੋਣ ਕਰਕੇ ਉਹ ਸਾਰੇ ਹੀ ਸਤਗੁਰੂ ਦੇ ਇੱਕ ਦੀ ਹੁੰਦਾ ਸਤਗੁਰੂ ਕੱਲਾ ਸਤਗੁਰੂ ਹੁੰਦਾ ਸੂਤਰ ਸਾਰੇ ਬਿਲਕੇ ਸਤਗੁਰੂ ਹੁੰਦੇ ਸਾਰੇ ਵੀ ਜਿਹੜੀ ਸੁਬੂਚੀ ਤੁਰਕੀ ਬਣ ਆਵਾਜ਼ ਆ ਇਹ ਪਾਣਾ ਜਿਹੜੂ ਕਹਿੰਦੇ ਆ ਅਸੀਂ ਤੁਰਕੀ ਬਾਣੀ ਵੀ ਕਹਿੰਦੇ ਆ ਅਨਹਾਦ ਨਾਦ ਵੀ ਕਹਿੰਦੇ ਆ ਕਈ ਨਾ ਹੋਦੇ ਹੁਕਮ ਵੀ ਐਸੇ ਦੁਖਾਈ ਦੇ ਮੈਂ ਕਹਿਆ ਸਭ ਹੁਕਮਾ ਹੋ ਜਿਓ ਉਹਨਾਂ ਦਾ ਗਿਆਨ ਹੈ ਆਇਆ ਹੋਇਆ ਹਰ ਦਾ ਗਿਆਨ ਉਹ ਬੁਲਾਉਂਦੇ ਨੇ ਕਹਿੰਦੇ ਅਸੀਂ ਤਾਂ ਬੋਲ ਰਹੇ ਸਾਰੇ ਹੀ ਆਗੇ ਨੂੰ ਜਿੰਨਾ ਸੱਚ ਸਾਰੇ ਸੇਵਕੇ ਬਣ ਕੇ ਕਹੇ ਤੇਰੇ ਸੇਵਕਾਂ ਪਾਖਾਕ ਤੇਰੇ ਜਿਹੜੇ ਸੇਵਕਾਂ ਦੇ ਆਦੇਸ ਵਿੱਚ ਆਉੜ। ਠੀਕ ਹੈ ਨਾਲੇ ਹੁਣ ਫਿਰ ਪੌੜੀ ਦੇ ਅਖੀਰ ਦੇ ਦੇ ਨੇੜੇ ਵੀ ਆ ਬਾਣੀ ਤੇ ਹੁਣ ਸਤਿਗੁਰੂ ਦੀ ਪੜਾਈ ਹੋ ਗਈ ਹੁਣ ਤੇ ਗੰਨ ਦੀ ਪੜਾਈ ਦੀ ਹੋ ਰਹੀ। ਠੀਕ ਹੈ ਜੀ। ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ ਜਿਨ ਹਰ ਸਿਉ ਹਮਾਰੀ ਪ੍ਰੀਤ ਬਣਾਈ। ਕਰਦੀ ਕਿਰਪਾ ਦੇ ਬਿਨਾ ਪ੍ਰੇਮ ਨਹੀਂ ਬਣਦੀ ਕਹਿੰਦੇ ਨੇ ਉਹ। कृपा ਦੇ ਬਿਨਾਂ ਪ੍ਰੀਤ ਬਣਦੀ ਉਹ ਨਹੀਂ ਕਿਰਪਾ ਨਾਲ ਚਹੀਦੀ ਹੈ ਜਿਹੜੇ ਆਪਣੇ ਯਤਨ ਨਾਲ ਜਤਨ ਕਰਦੇ ਬਸ ਕੀ ਤਾਂ ਵੀਰ ਜਤਨ ਨਹੀਂ ਸਭ ਫਰੇਡਰ ਹੈ ਘਰ ਕਰਦੀ ਉਹਦੀ ਕਿਰਪਾ ਨਾਲ ਸਭ ਕੁਝ ਹੋਇਆ ਕਿ ਅਸੀਂ ਕੁਝ ਨਹੀਂ ਕਰ ਸਕਦੇ ਹਾਂਜੀ ਠੀਕ ਹੈ ਜੀ ਇੱਥੇ 19ਵੀਂ ਪੜੋ ਸਮਾਪਤੀ ਹੈ ਜੀ